ਸ਼ਲੋਕ ਮਹੱਲਾ ਤੀਜਾ ਅਭਿਆਗਤ ਇਹਨਾਂ ਆਖੀਆਂ ਜਿਨਕੇ ਚਿਤ ਮਹਿ ਭਰਮ ਤਿਸ ਦੇ ਦਿੱਤੇ ਨਾਨਕਾ ਤੇਹੋ ਜਿਹਾ ਧਰਮ ਅਭਿਆਗਤ ਕਹਿੰਦੇ ਸੀਗੇ ਅਭਿਆਗਤ ਚੱਕਰਵਰਤੀ ਕਹਿੰਦੇ ਨੇ ਹੁਣ ਬਈ ਉਹ ਕੋਈ ਘਰਦਾਲ ਨਹੀਂ ਹੁੰਦਾ ਬਸ ਜਿੱਥੇ ਦੇਖਿਆ ਫਿਰਦੇ ਤੁਰਦੇ ਹੀ ਰਹਿੰਦੇ ਨੇ ਉਹਨਾਂ ਨੇ ਘਰਦਾਲ ਦੇ ਡੇਰੇ ਡੰડા ਬਣਾਉਂਦੇ ਨਹੀਂ ਹੁੰਦੇ ਦਾਰਦ ਨੂੰ ਜਿਵੇਂ ਕਹਿੰਦੇ ਨੇ ਵੀ ਅੱਧੇਗਾ ਤੇ ਨਾ ਆਖੀਂ ਉਹ ਅੱਧੇਗਾ ਤੂੰ ਨਹੀਂ ਕਹਿ ਸਕਦੇ ਜਿਹਦੇ ਮਨ ਚ ਭਰਮ ਹੋਵੇ ਚਿੱਤੇ ਚ ਭਰਮ ਹੋਵੇ ਉਹਦਾ ਦਾ ਮਤਲਬ ਇਹ ਨਹੀਂ ਹੈ ਵੀ ਘਰ-ਬਾਰ ਹੁੰਦਾ ਉਹ ਜਿਹਦੇ ਅੰਦਰ ਜਾਣਣੇ ਚੰਨ ਹੋਵੇ ਨੇ ਨਾ ਉਹਦਾ ਅਗਿਆਨਤਾ ਨੂੰ ਜਿਹੜਾ ਹਰੇ ਕਬੂਦੀ ਨੂੰ ਗਤੀਸ਼ੀਲ ਕਰ ਦੂ ਠੀਕ ਹੋਵੇ ਸੰਸਾਰੀ ਲੈਵਲ ਦਾ ਉਹਨੂੰ ਹੋਦ ਤੇ ਆਪਣੇ ਗਿਆਨ ਦਾ ਰੰਗ ਹੋਰ ਝਾੜ ਦੇਵੇ ਜੋ ਵੀ ਬੋਧ ਹੈ ਸੰਸਾਰ ਦੇ ਵਿੱਚ ਜਿੰਨਾ ਮਰਜੀ ਕਿਸੇ ਧਰਮ ਦਾ ਬੋਧ ਹੋਵੇ ਮਤ ਦਾ ਉਹਦੇ ਤੇ ਆਪਣਾ ਹੋਰ ਰੰਗ ਝਾੜ ਦੇਵੇ ਪ੍ਰਭੋਦ ਕਹਿੰਦੇ ਨੇ ਇਹਨੂੰ ਠੀਕ ਹੈ ਬੋਧ ਦੇ ਉੱਪਰ ਹੋਰ ਬੋਧ ਝਾੜ ਦੇਣਾ ਜਿਹੜਾ ਬੋਧ ਉੱਪਰ ਬੋਧ ਝਾੜਦੇ ਫਤਮਗਿਆਨੀ ਹੋਵੇ ਆਤਮੰਦਰਸ਼ੀ ਹੋਵੇ ਵਿਰਮ ਗਿਆਨੀ ਹੋਵੇ ਜਾਂ ਗੁਰਮੁਖ ਹੋਵੇ ਉਹਦੀ ਹੈ ਬਦਲੋ ਉਹ ਵੀ ਅੰਦਰ ਤੁਰ। ਪਰਮਤੂ ਰਹਿਤ ਹੋਵੇ ਕਹਿੰਦਾ ਭਾਵੇਂ ਹੈ ਨਾ ਜੀ। ਪਰਮਤੂ ਰਹਿਤ। ਹਾਂ ਜੀ। ਜੇ ਪਰਮਤੂ ਰਹਿਤ ਕਹਿੰਦਾ। ਹਾਂ ਜੀ। ਜਿਹੜਾ ਪਰਮਤੂ ਰਹਤਾ ਹੈ ਉਹਦੇ ਉੱਪਰ ਹੋਈ ਹੋਈ ਹੋਈ ਦਾ ਕਰਮ ਉਹ ਹੀ ਸਕਦਾ ਜਿਹਦੇ ਅੰਦਰ ਪਰਮਣੀ। ਇਹ ਮੇਰੇ 'ਚ ਪਰਮਾ। ਮੈਂ ਦਾ ਪੇਮ ਤਿਸ ਦੇ ਦਿੱਤੇ ਨਾਨਕਾ ਤੇਹੋ ਧਰਮ। ਉਨਾਂ ਦੇ ਧਰਮ ਦੇ ਸਕਦਾ ਜਿੰਨਾ ਕੋਤੇ ਕੋ ਰੂਗ ਗਿਆ ਜੇ ਉਹਦੇ ਕੋਲੇ ਭਰਮ ਗਿਆਨੀ ਆਪ ਉਹ ਭਰਮ ਜੋ ਵਸੂ ਰਹੂਗਾ ਉਨਾਂ ਜਿੰਨਾ ਤੂੰ ਹਾਂ ਜੇ ਪਾਣੀ ਮਹਿਲਾ ਉਹ ਸ਼ੁੱਧ ਕਰ ਸਕਦਾ ਕਪੜੇ ਨੂੰ ਫਿਰ ਠੀਕ ਹੈ ਜੀ ਜਿੱਤੇ ਹੋਈ ਸੋਭਾਈ ਸਾਹਿਬ ਜੇ ਆਪਣੀ ਬੁੱਧ ਹੈ ਜੇਤੀ ਹਾਂਜੀ ਬੰਦ ਪੈਣ ਪੈਣ ਹਾਂਜੀ ਭੈ ਨਿਰੰਜਨ ਪਰਮ ਪਦ ਤਾਂ ਕਾ ਭੁੱਖਾ ਹੋਏ ਤਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਈ ਹਾਂ ਆ ਆ ਹਾਂ ਜੇ ਨਾਮ ਨਹੀਂ ਕੋ ਖੋਵੇ ਅੰਦਰ ਤਾਂ ਗੱਲ ਬੰਦੀ ਹੈ ਜੇ ਕੋਈ ਭੁੱਖ ਨਾਮ ਦੇ ਬਿਨਾ ਹੋਰ ਹੋਵੇ ਗੁਰਮੁਖੀ ਨਹੀਂ ਹੈ ਉਹ ਉਹ ਅੱਛਾ ਨਹੀਂ ਹੈ ਉਹ ਵਹਿਦਾ ਨਹੀਂ ਹੋਣਾ ਦੋ ਉਹ ਅਨਤ ਜਦੇ ਹੋ ਸਕਦਾ ਜੇ ਆਪ ਹੈ ਪਤਾ ਹੈ ਕੋ ਜਿੰਨਾ ਸਿਰ ਭਰਨਾ ਇੱਕ ਤਾਂ ਹੈ ਮੇਰਾ ਭਰਮ ਗਿਆ ਭੋ ਭਗਾ ਜੇ ਭਰਮ ਜਾਊਗਾ ਤਾਂ ਪੈ ਹੋਣਾ ਜਿੰਨਾ ਸਿਰ ਭਰਮ ਆਤਾ ਹੈ ਹੋਈ ਨਹੀਂ ਸਕਦਾ ਤਾਂ ਇਹਨੂੰ ਤਾਂ ਹੋਈ ਨਹੀਂ ਸਕਦਾ ਭਰਮ ਗਿਆ ਭੋ ਭਗਾ ਹਾਂ ਿਸਕਾ ਭੋਜਨ ਨਾਮਿਕਾ ਵਿਰਲਾ ਪਾਏ ਕੋਈ ਉਹ ਭੋਜਨ ਹੈ ਗਿਆਨ ਭੋਜਨ ਉਹ ਵਿੱਲੇ ਨੂੰ ਮਿਲਦਾ ਨਾ ਭੋਜਨ ਸੱਚ ਖਾਣਾ ਸੱਚ ਪਹਿਨਣਾ ਉਹ ਬਿੱਲਾ ਹੀ ਪਾਉਂਦਾ ਬਿੱਲੇ ਦੇ ਅੰਦਰ ਭੁੱਖ ਹੁੰਦੀ ਹੈ ਭੁੱਖ ਫਿਰਦਾ ਮਿਲਿਆ ਜੇ ਪੈਂਦੀ ਸਾਰੀ ਬਦਲ ਗਿਆ ਭੁੱਖ ਹੋਣੀ ਚਾਹੀਦੀ ਹੈ ਹਾਂਜੀ ਮਹੱਲਾ ਤੀਜਾ ਅਭਿਆਗਤ ਇਹ ਨਾ ਆਖੀਆਂ जे पार कर भोजन करें कारण अपने पहले भी करें आओ ही गल कह दिया कि अपना घर नहीं पर पाई मिल गया ओथे रोटी खा लेनी या ब्याह 갔다 अरे ओ नहीं ब्याह 갔다 दूसरे जगह रोटी खाने वाले नानक राह से ਉਹ ਕਮਾਈ ਕਰਕੇ ਆਪਨਾ ਢੱਡ ਪਾਉਣਾ ਕਿਸੇ ਦੇ ਦੇਣ ਮੰਗਣ ਦਾ ਦਾਤੇ ਹੋਣ ਪੁਖਾਰੀ ਨਾ ਹੋਣ ਬੰਨਣਾ ਆਪਣੇ ਆਪ ਨੂੰ ਠੀਕ ਹੈ ਦਾਤੇ ਆ ਪਰ ਕਾਰਨ ਆਪਣੇ ਬਹਿਲੇ ਭੇਖ ਕਰਨ ਉਹਦਾ ਤੇ ਭਰਾ ਫਿਰਦੇ ਨੇ ਰੰ ਕਪੜੇ ਪਾਏ ਹੋਏ ਠੀਕ ਇਹ ਤਾਂ ਜੀ ਆਪਿਆ ਜਾ ਤਾਂ ਬਸ ਅਸੀਂ ਕਾ ਜਿੱਥੇ ਮਿਲ ਗਈ ਉੱਥੇ ਸ਼ਗਲ ਲੈਨੇ ਆ ਨਾ ਨਾ ਜੀ ਠੀਕ ਹੈ ਸਾਰਾ ਆਪਣਾ ਰੋਟੀਆਂ ਆਗਤ ਸੋਈ ਨਾਨਕਾ ਆਤਮ ਗਾਉਣ ਭਾਲ ਨਿਜ ਕਰ ਰਹਿਣ ਕਰੇ ਜੇ ਆਦਮ ਚਿੰਤਨ ਕਰ ਕੌਣ ਗੁਨਾਹ ਗੁਨਾਹ ਮੇਟੇ ਨਾ ਭਰਮ ਕੀ ਕਾਈ ਆਪਿਆ ਗਤੋ ਨੇ ਜਿਹੜੇ ਆਤਮਾ ਨੂੰ ਚਿੰਤਨ ਆਤਮ ਚਿੰਤਨ ਕਰਨ ਨੂੰ ਆਪਣੇ ਮੂਲ ਦੀ ਖੋਜ ਕਰਨ ਉਹ ਭਾੜ ਵੀ ਲੈਂਦੇ ਨੇ ਗੁਰਮੁਖ ਢੂੰਡ ਟੜਦੇ ਸੱਜਣ ਲੱਗਾ ਜਿਹ ਆਪਣਾ ਤਰ ਤੂੜੂਗਾ ਸੱਜਣ ਤਾਂ ਅੰਦਰ ਲੱਭ ਜੂਗਾ ਨੂੰ ਉਹ ਆਪਿਆ ਨੇ ਜਿਹੜੇ ਆਤਮ ਚਿੰਤਨ ਕਰਨ ਆਪਣੇ ਹਿਰਦੇ ਜੋ ਆਪਣੇ ਮੂਲ ਨੂੰ ਅੰਦਰੋਂ ਉਹ ਆਪਿਆ ਗਤ ਕੌਣ ਤੋਂ ਕੀ ਆਤਮ ਆਪਣੇ ਆਪ ਨਾਲ ਜੁੜ ਜਾਂਦੇ ਨੇ। ਅੱਛਾ ਜੀ। ਇੱਕ ਹੋ ਜਾਂਦੇ ਨੇ ਉਹ। ਹਮੇਸ਼ਾ ਵਾਸਤੇ ਇੱਕ ਹੋ ਜਾਂਦੇ। ਅੱਛਾ ਜੀ। ਗਾਉਣ ਤੋਂ ਭਾਵ ਗਾਉਣਾ ਨਹੀਂ ਹੁੰਦਾ, ਇਹ ਆਪਣੇ ਮੂਡ ਨਾਲ ਜੁੜ ਜਾਣ। ਭਾਲ ਲੈਣ ਸ਼ੋ ਆਪਣਾ ਨਿੱਜ ਘਰ ਰਹਿਣ ਕਰੇਣ। ਲੱਭ ਲੈਣ ਉੱਥੇ ਚਲੇ ਜਾ। ਮੈਡੀਕਲ ਤੇ ਰਹਿਣ ਜਾ ਕੇ। ਕੁੜੀ ਛੱਡ ਕੇ ਦਸ ਚਲੇ ਜਾਣ। ਦੁਆਰ ਕਿਉਂ ਦਿਲ ਵਿੱਚ ਚਲੇ ਜਾਣ। ਦਰਗਹ ਦਾ ਰਿਸ਼ਤਾ ਛੱਡ ਕੇ ਦਿਲ ਨਾਲ ਜੋੜ ਲੈਣ ਰਿਸ਼ਤਾ ਹਾਂਜੀ ਆਉੜੀ ਅੰਬਰ ਧਰਤੀ ਵਿਛੋੜੀਆਂ ਵਿੱਚ ਹੈ ਜਿਸ ਵਿੱਚ ਸੱਚਾ ਨਾਮ ਅੰਬਰ ਨੇ ਧਰਤੀ ਵੱਖ ਕੀਤੀ ਹੋਈ ਅੰਬਰ ਵੱਖਰੇ ਧਰਤੀ ਵੱਖਰੀ ਹੈ ਅੰਬਰ ਦੇ ਵਿੱਚ ਧਰਤੀ ਹੈ ਨਾ ਅੱਡ ਅੱਡ ਨੇ ਵੱਖਰੇ ਵੱਖਰੇ ਨੇ ਮਾਇਆ ਕਰਕੇ ਮਾਇਆ ਜਰ ਰਹੀ ਅੰਬਰ ਬਖਰੇ ਤਰਤੀ ਬਖਰੀ ਵਿੱਚ ਸੱਚਾ ਅਸਰਾ ਹੈ ਸੱਚਾ ਬਚੇ ਹੈ ਜਿਹੜਾ ਸਾਡਾ ਹਿਰਦਾ ਅੰਬਰ ਹੈ ਨਾ ਉਹ ਸੱਚਾ ਉੱਥੇ ਹੈ ਉਹਦੇ ਆਸਰੇ ਹੈ ਖੜਾ ਉਹ ਆਸਰਾ ਉਹਦਾ ਥੰਮੀ ਉਹਦਾ ਥੰਮਿਆ ਹੋਇਆ ਹੈ ਸਰੀਰ ਕਿਹਦਾ ਥੰਮਿਆ ਹੋਇਆ ਸੱਚ ਦੇ ਆਸਰੇ ਝੂਠ ਚੱਲਦਾ ਸਰੀਰ ਝੂਠ ਹੈ ਅਸੀਂ ਝੂਠ ਦੇ ਆਸਰੇ ਸੱਚ ਨੂੰ ਖੜਾ ਕਰਨ ਲੱਗੇ ਹਾਂ ਮਾਇਆ ਦੇ ਆਸਰੇ ਸੱਚ ਦਾ ਪ੍ਰਚਾਰ ਕਰਨ ਲੱਗੇ ਹੋਏ ਆ। ਉਹ ਝੂਠੀ ਮਾਇਆਏ ਸੱਚ ਨੂੰ ਆਸਰਾ ਕਿੱਥੋਂ ਦੇ ਦੂਗੀ? ਸੱਚ ਦੇ ਆਸਰੇ ਤਾਂ ਸਭ ਕੁਝ ਹੁੰਦਾ। ਇਹਨਾਂ ਦੇ ਸੱਚ ਨੂੰ ਮਾਇਆ ਦੇ ਆਸਰੇ ਦੀ ਲੋੜ ਹੈ ਜੀਵ ਗੱਲ। ਉਹ ਮਾਇਆ ਦੀ ਸੱਚ ਨੂੰ ਵੀ ਜੇ ਕਿਸੇ ਆਸਰੇ ਦੀ ਲੋੜ ਹੈ ਸੱਚ ਕਿੱਥੇ ਹੈ ਉਹ? ਸੱਚ ਹੀ ਨਹੀਂ। ਉਹ ਝੂਠਾ, ਸੱਚ ਨਹੀਂ ਹੈ। ਸੱਚ ਨੂੰ ਕਿਸੇ ਆਸਰੇ ਦੀ ਲੋੜ ਨਹੀਂ। ਸੱਚ ਦੇ ਆਸਰੇ ਤਾਂ ਸਾਰੇ ਸਭ ਕੁਝ ਚੱਲਦਾ। ਸੱਚ ਨੂੰ ਕਿਸੇ ਮਾਇਆ ਦੀ ਲੋੜ ਨਹੀਂ। ਆਤਿ ਰੀ ਲੋਰਨੀ ਸੱਚ ਤਾਂ ਸਭ ਦਾ ਆਸਰਾ ਹੈ ਹਾਂਜੀ ਘਰ-ਦਾਰ ਸਭੋ ਸੱਚ ਹੈ ਜਿਸ ਵਿੱਚ ਸੱਚਾ ਨਾਮ ਘਰ-ਦਾਰ ਉਹ ਸੱਚਾ ਜਿੱਥੇ ਨਾਮ ਸੱਚਾ ਹੈ ਹਿਰਦਾ ਨਹੀਂ ਤੇ ਘਰ ਸਾਡਾ ਹਿਰਦਾ ਘਰ ਤਾਂ ਸੱਚਾ ਹੈ ਮਹਿਲ ਤਾਂ ਮੰਦ ਹੈ ਜੇ ਨਾਮ ਹੋਵੇ ਅੰਦਰ ਫਿਰ ਸੱਚ ਹੈ ਹੱਚ ਕਦੇ ਢਹਿਣਾ ਨਹੀਂ ਵਰਦਾ ਨਹੀਂ ਖਤਮ ਨਹੀਂ ਹੁੰਦਾ ਪੁਰਾਣਾ ਨਹੀਂ ਹੁੰਦਾ ਸੱਚ ਪੁਰਾਣਾ ਹੋਵੇ ਨਹੀਂ ਫਿਰ ਮਹਿਲ ਦਾ ਮਹਿਲੇ ਰਹਿ ਜਾਂਦਾ ਮਹਿਲਾ ਪਹਿਲਾ ਮਹਿਲਾ ਦੂਜਾ ਇਕੀ ਨੇ ਸੱਚਾ ਹੋ ਨਾਨਕ ਬੱਦਲ ਕਰਤਾ ਜਿੱਤੇ ਮਰਤੇ ਨਾ ਜਨਮ ਜਰੋ ਮਰਤਾ ਨਾ ਜਨਮੈ ਨਾ ਜਰਾਰੋ ਉਹ ਸੱਚ ਘਰ ਤੇ ਦਰ ਕੀ ਹੈ ਜੀ ਘਰ ਸੋ ਦਰ ਕਿਹਾ ਸੋ ਕਰਕੇ ਆਂ ਅੱਛਾ ਜੀ ਹਿਰਦਾ ਘਰ ਹੈ ਹਿਰਦਾ ਈਦਾਰੇ ਜੇ ਨਾਮ ਹੈ ਤਾਂ ਸੱਚਾ ਹੋ ਤਾਂ ਵਿਚਾ ਰਹਿਣ ਵਾਲਾ ਜੇ ਨਾਮ ਨਹੀਂ ਹੈ ਫੇਰ ਨਹੀਂ ਫਟੇ ਜਾਣਾ ਉਹਨੇ ਇਹ ਸੱਚਾ ਨੋਏ ਦੇ ਹਿਰਦੇ ਚ ਨਾਉਨ ਸੱਚਾ ਨਾਮ ਤਾ ਕਰਦਾਰ ਸੱਚਾ ਤਾਂ ਨਿਜ ਘਰ ਹੈ ਉਹ ਅਵਸਥਾ ਗੁਰੂ ਕਬੀਰ ਹੁੰਦੀ ਹੈ ਐਵੇਂ ਗੱਲਾਂ ਨਾਲ ਨਹੀਂ ਹੋ ਜਾਂਦਾ ਤਾ ਸੰਦואר ਉੱਥੇ ਹਾਂਜੀ ਸਭ ਸੱਚਾ ਹੁਕਮ ਵਰਤਦਾ ਗੁਰਮੁਖ ਸੱਚ ਸਮਾਉ ਹਾਂ ਗੁੰਦਾ ਸਾੜੀ ਵਰਦਾ ਦੇ ਹਿਰਦੇ ਚ ਸੱਚ ਹੁੰਦਾ ਹੈ ਉਹਨਾਂ ਦੇ ਹਿਰਦੇ ਵਿੱਚ ਸੱਚ ਪ੍ਰਗਟ ਹੁੰਦਾ ਉਹ ਸੱਚ ਤਾਂ ਦਾ ਸਤਿਗੁਰ ਦੇ ਨੇ ਹਰਦਨ ਗਾ ਕੇ ਚ ਗੁਰਮੁਖੀ 나ਦਾਂ ਗੁਰਮੁਖੀ ਵੇਦਾਂ ਗੁਰਮੁਖਾਂ ਨੇ 나ਦ ਪ੍ਰਗਟ ਕੀਤਾ 나ਦ 나ਦ ਦੀਆਂ ਗੱਲਾਂ ਜ਼ਰੂਰ ਕਰਦੇ ਨੇ ਯੋਗੀ ਵੀ ਪਰ ਗੁਰਮੁਖਾਂ ਦੇ ਬਚਨ ਬੋਲ 나ਦ ਹੁੰਦਾ ਸੁਣਿਆ ਸੁਣਦੇ ਨੇ 나ਦ ਜਿਹੜਾ ਬੋਲਦੇ ਨੇ ਉਹ ਉਪਦੇਸ਼ ਉਹ ਅਸਲ ਤੇ 나ਦ ਹੁੰਦਾ ਹੈ ਦਾ ਜਿਹੜਾ ਗਿਆਨ ਹੈ ਅਸਲ ਤੇ ਉਹ ਫਰਗਟ ਕਰਦੇ ਨੇ ਉਹ 나ਦ ਨਹੀਂ ਫਰਗਟ ਕੀਤਾ ਜਾ ਸਕਦਾ ਜੋ ਬੋਲਿਆ ਉਹ ਗਿਆਨ ਹੈ 나ਦ ਦਾ 나ਦ ਨਹੀਂ ਹੁਕਮ ਬੋਲਿਆ ਨਹੀਂ ਜਾ ਸਕਦਾ ਹੁਕਮ ਨਾਲ ਕਹਿਆ ਜਾਏ ਹੁਕਮ ਬਾਰੇ ਕੁਝ ਕਿਹਾ ਹੋਇਆ ਹੁਕਮ ਦਾ ਗਿਆਨ ਕਰਾਇਆ ਹੁਕਮ ਨਹੀਂ ਹੁਕਮ ਉਹ ਡਾਇਰੈਕਟੇ ਹੁੰਦਾ ਉਹ ਨਾਲ ਹੀ ਬੋਲਿਆ ਜਾਂਦਾ ਹਾਂਜੀ ਸੱਚਾ ਆਪ ਤਾਖਤ ਸੱਚਾ ਬਹਿ ਸੱਚਾ ਕਰੇ ਨਿਉ ਸਭ ਸੱਚੋ ਸੱਚ ਵਰਤਦਾ ਗੁਰਮੁਖ ਅਲਖ ਲਖਾਈ ਔਰ ਸੱਚਾ ਤਖਤ ਹੈ ਸੱਚਾ ਆ ਆਪ ਉਹ ਆਸ ਹੈ ਉਥੇ ਤਖਤ ਸੱਚਾ ਹੈ ਕਾਲ ਤਖਤ ਉਸੇ ਦਾ ਨੂਨ ਉਹਨੂੰ ਕੌਣ ਢਾਦੂ ਕਿ ਮੈਂ ਢਜੂ ਉਹ ਹੈ ਮਰਤ ਨਹੀਂ ਹੈ ਜਨਮ ਨਹੀਂ ਜਰਾ ਨਹੀਂ ਉਹ ਅਕਾਲ ਤਖਤ ਹੈ ਇਸੇ ਨੂੰ ਕਿਹਾ ਹੋਇਆ ਅਕਾਲ ਤਖਤ ਕਿਆ ਕੇ ਬਾਹਰ ਬਣਾਤਾ ਹਾਂ ਮੈਂ ਜੋ ਨੂੰਨ ਨੇ ਬਣਾ ਲਈ ਸੀ ਹੁਣ ਦੇਖਦੇ ਫਿਰਦੇ ਹੁਣ ਜੇ ਕੋਈ ਟਿੱਪਣੀ ਕਰ ਦਿੰਦਾ ਆ ਵੀ ਪਾਈ ਅਸੀਂ ਲੋਕਾਂ ਨੇ ਟਿੱਪਣੀ ਕੀਤੀਆਂ ਉਲਟੇ ਦਾ ਪਏ ਹੋਇਆ ਟਿੱਪਣੀਆਂ ਸਾਡੇ ਤੇ ਵੀ ਹੋਣਗੀਆਂ ਇਹ ਨਹੀਂ ਗੱਲ ਹੋ ਸਕਦੀ ਬੀਬੀ ਅਸੀਂ ਜੋ ਮਰਜੀ ਕਹੀਏ ਸਾਡੇ ਤੇ ਵੀ ਟਿੱਪਣੀ ਨਾ ਕਰੇ ਇਹ ਸਾਡੇ ਦੀ ਕਰਾਪਟਾ ਉਂਗਲੀ ਸਾਡੇ ਵੱਲ ਵੀ ਉਂਗਲੀ ਰਾਵੜ ਸਾਡੇ ਆਈ ਹੋਈ ਐ ਉਂਗਲੀ ਤਾਹਂਸਦੀ ਆਪਣੀ ਘਰਾਵਰ ਨੂੰ ਸਮਝੋ ਦੂਰ ਕਰੋ ਗੁਰਬਾਣੀ ਨੇ ਜਦਾਂ ਕਹਿਆ ਕਰੀ ਹੋਈ ਐ ਟਿੱਪਣੀਆਂ ਕੀਤੀਆਂ ਹੋਈਆਂ ਨੇ ਹਾਡੇ ਤੇ ਤੇ ਗ੍ਰਾਮ ਦਾ ਗਿਆ ਤਾਂ ਟਿੱਪਣੀ ਉਂਗਲੀ ਉਠੂਗੀ ਸਾਨੂੰ ਸੁਧਾਰ ਕਰਨ ਜਾਇਦਾ ਲੋਕਾਂ ਨਾਲ ਲੜਣਾ ਨਹੀਂ ਚਾਹੀਦਾ ਤੁਰ ਆਪਰੇ ਚਲਣਾ ਚਾਹੀਦਾ ਸੱਚਾ ਆਪੇ ਉਹ ਜਿਹੜੇ ਤਖਤੇ ਬੈਠੇ ਤਾਂ ਹੀ ਨਿਉ ਕਰੂਨ ਤਾਂ ਅਖਾਲਸ ਤਖਤੇ ਪਰਮੇਸ਼ਰ ਕਿੱਥੇ ਬੈਠੇ ਉੱਥੇ ਉੱਥੇ ਬੈਠਾ ਕੌਣ ਹੈ ਖੁਦ ਤੇ ਆਪ ਬੈਠਾ ਉਹ ਤਾਂ ਸੱਚਾ ਤਖਤ ਸੱਚਾ ਤਖਤੇ ਅਖਾਲਸ ਤਖਤੇ ਕੈਸਾ ਹੈ ਇਹ ਕਾਲ ਹੈ ਉਹੀ ਕਾਲ ਹੈ ਨਹੀਂ ਹਾਂਜੀ ਸਬ ਸੱਚੋ ਸੱਚ ਵਰਤਦਾ ਗੁਰਮੁਖ ਲਖ ਲਖਾਈ ਜਿੱਥੇ ਉਹ ਆਪਨੇ ਉਹ ਕਰਦਾ ਉਥੇ ਸੱਚੋ ਸੱਚ ਵਰਤਦਾ ਹੈ ਸਾਡੇ ਘਰ ਦੇ ਸੱਚੋ ਸੱਚ ਵਰਤਦਾ ਹੈ ਸੱਚ ਵਰਤਦਾ ਚੁਣ ਵਖ ਕੱਢੇ ਜਜਮਾਲਿਆ ਫੌ ਨਾ ਪਾਇਆ ਨਕੂੜਿਆ ਰਭੂ ਘਾਰੇ ਦੋਜੀਕ ਚੱਲੇਆ ਲੇਖਣਾ ਧਰਮ ਬਹਲੇ ਇਹ ਗੱਲ ਕਹੀ ਆ ਸਦੀਾਰ ਕੀ ਕਿਹਾ ਸੀ ਕਿ ਅਸੀਂ ਕਰਕੇ ਕਰ ਰਹੇ ਆ ਤੇ ਉਂਗਲੀ ਉਠੋ ਨਹੀਂ ਉਹ ਵੀ ਤੜਫੇ ਸੀ ਜਿਹਨਾਂ ਵੱਲ ਅਸੀਂ ਉਂਗਲੀ ਉਠਾਈ ਸੀ ਕਾਇਆ ਨੇ ਤਾਂ ਲੋਕਾਰੇ ਹੋਏ ਤੇ ਸਾਡੇ ਤੇ ਸਾਨੂੰ ਆਪਣੇ ਜ਼ਰਦਾਰ ਕਰਨਾ ਚਾਹੀਦਾ ਆਪਣੇ ਅੰਦਰ ਝੱਟਣਾ ਚਾਹੀਦਾ ਸਾਡੇ ਜਗਰਾਵਟ ਕਿਉਂ ਆਈ ਹੈ ਹਾਂਜੀ ਗੁਰਮੁਖ ਦਾ ਲੱਖ ਲਖ ਆਈ ਗੁਰਮੁਖ ਨੇ ਲੱਖ ਦੇਖ ਲਿਆ ਲੱਖ ਹੈ ਉਹ ਅੱਖਾਂ ਨੂੰ ਨਹੀਂ ਦੇਖਣਾ ਅਡਾ ਪਰ ਗੁਰਮੁਖਾਂ ਨੇ ਸਮਝ ਲਿਆ ਅਦਾਲਤ ਤੱਕ ਤਾਂ ਲੱਖ ਹੁੰਦਾ ਹੈ ਉਹ ਅਲੱਖ ਹੈ ਬੈਠਣ ਵਾਲਾ ਵੀ ਅਲੱਖ ਹੈ ਕਾਨੂੰਨੀ ਦੇਖਣਾ ਕੁਝ ਵੀ ਇਹ ਤਾਂ ਅੱਖਾਂ ਨੂੰ ਨਹੀਂ ਸਭ ਕੁਝ ਤੁਸੀਂ ਕਿਵੇਂ ਗੱਲਾਂ ਨੂੰ ਹਜ਼ਮ ਕਿਵੇਂ ਹੋ ਜਾਣ ਸਮਝਦਾਰ ਆਦਮੀਆਂ ਟਿੱਪਣੀ ਹੋਊਗੀ ਆਤੂਤੀ ਗਲਤੀਆਂ ਕਰਦੇ ਜੇ ਗਲਤੀਆਂ ਹੋਈਆਂ ਤਾਂ ਦੱਸੋ ਹੈ ਜੀ ਅ ਇੱਥੇ ਛੇਵੀਂ ਪੌੜੀ ਦੀ ਸਮਾਪਤੀ ਹੈ ਜੀ ਕਿ ਜਿਹੜਾ ਛੀਰੀ ਪੰਕਤੀ ਹੈ ਉਹਦਾ ਕਾਫੀਆ ਅਲੱਗ ਹੈ ਪਿੱਛੋਂ ਇੱਥੇ ਦੇਖੋ ਨਾ ਪੌੜੀ ਚ ਸੀਗਾ ਅਸਰਾਓ ਉਸ ਤੋਂ ਬਾਅਦ ਆਇਆ ਨਾਉ ਉਸ ਤੋਂ ਬਾਅਦ ਆਇਆ ਸਮਾਓ ਇਹ ਉਸ ਤੋਂ ਬੜਾ ਨਿਆਓ ਪਰ ਅਖੀਰੀ ਪੰਕਤੀ ਦਾ ਅਲਖ ਲਖਾਈ ਹੈ ਜਿਹੜਾ ਰਹਾਉ ਨਾਲ ਮਿਲਦਾ ਵਾਹ ਵਾਹ ਸਚੇ ਪਾਤਸ਼ਾਹ ਅੱਛਾ ਅੱਛਾ ਹਾਂ ਸੱਚਾ ਨਹੀਂ ਤੇ ਆਗੇ ਹਾਂ ਉਹ ਸ਼ਾਇਦ ਤਾਂ ਹੀ ਉਹ ਪੜਦੇ ਆ ਬਾਰ-ਬਾਰ ਇਹਨੂੰ ਹਾਂਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਫਿਰ ਜੋ ਉਹਨਾਂ ਨੂੰ ਇਹ ਅਰਥ ਦੇ ਅਨਰਥ ਨਹੀਂ ਚਾਹੀਦੇ ਪੜਨ ਕੋਈ ਫਰਕ ਨਹੀਂ ਠੀਕ ਹੈ ਜੀ ਤੇ ਠੀਕ ਪੜ੍ਹ ਕੇ ਦੇ ਅਨਰਥ ਕਰਾਂਗੇ ਫਿਰ ਉਹਦਾ ਕੀ ਫਾਇਦਾ ਹੋਊਗਾ ਤੋ ਆਰਥਕ ਉਹ ਤੋਂ ਥੋੜਾ ਪਲਾ ਹੋ ਜੀ ਅਸੀਂ ਬਾਕੀ ਕੁਝ ਨਹੀਂ ਇੱਥੇ ਛੇਵੀਂ ਬੋਡੀ ਸਮਾਪਤੀ ਹੈ ਜੀ